ਸੰਤ ਦਾ ਦੋਖੀ ਅੱਧ ਬੀਜ ਤੇ ਟੂਟੇ ਸੰਤ ਦਾ ਦੋਖੀ ਕਿਤੇ ਕਾਜ ਨਾ ਪਹੁੰਚੇ ਸੰਤ ਦਾ ਦੋਖੀ ਅੱਧ ਬੀਜ ਤੇ ਟੂਟੇ ਪੱਕ ਕੇ ਹੀ ਟੁੱਟਦਾ ਫਲ ਉਹਦਾ ਆਬ ਰੁਖਾਇਦਾ ਜਨਬ ਇਹਦੇ ਵਿੱਚ ਪੱਕਣਾ ਆਇਆ ਹੋਇਆ ਹੈ ਜਿਉਂ ਮਨ ਫਲ ਪੱਕੇ ਕੋਲ ਮਾਇਆ ਵੀ ਛੱਡ ਦਵੇ ਆਪ ਹੀ ਇਤਹਾਸ ਦੁਬਾਏ ਜਮਰ ਅਬਦਾਸ ਨੇ ਕਹਿ ਸੀ ਦੇ ਤਿਆਗੀ ਮਾਇਆ ਤੋੜ ਲਾਂ ਤਾਂ ਪਰ ਕੱਚਾ ਹੀ ਟੁੱਟ ਜਾਂਦਾ ਅਸਲੀ ਤੇ ਠੀਕ ਜਦ ਇਹ ਜੀਰ ਛੱਡਦਾ ਮਾਇਆ ਦੀ ਭੁੱਖ ਦੇ ਵਿੱਚ ਹੁੰਦੀ ਹੈ ਮਾਇਆ ਦਾ ਉਹ ਵਿੱਚ ਲੈ ਕੇ ਹੀ ਮਰ ਜਾਂਦਾ ਜੇ ਉਹ ਲੈ ਕੇ ਫਰੂਗਾ ਦੁਬਾਰਾ ਜਨਮ ਉਹਨਾਂ ਵਿੱਚ ਟੁੱਟ ਗਿਆ ਕੋਈ ਫਾਇਦਾ ਨਾ ਆਉਂਦਾ ਜਨਮ ਲੈਣ ਦਾ ਮੁੱਖਾ ਮੁੱਖਾ ਜਨਮ ਲੈਣ ਦਾ ਫਾਇਦਾ ਹੀ ਨਹੀਂ ਚਾਹੇ ਉਹ ਗੁਰੂ ਬਣਿਆ ਹੋਇਆ ਮੁੱਖਾ ਜਨਮ ਉਹਦਾ ਐਵੇਂ ਦਾ ਦੋਖੀ ਅੱਧ ਬੀਜ ਤੇ ਟੁੱਟੇ ਸੰਤ ਦਾ ਦੋਖੀ ਕਿਤੇ ਕਾਜਨਾ ਪਹੁੰਚੇ ਕਿਸੇ ਕਾਜਨਾ ਪਹੁੰਚੇ ਨਾ ਘੜਦਾ ਰਿਹਾ ਨਾ ਘੜਦਾ ਰਿਹਾ ਕਿਤੇ ਨਾ ਧੋ ਨਾ ਘਾਰ ਹੈ ਨਾ ਘਾਟ ਹੈ ਹੋਜੀ ਉਦਿਆਨ ਪਰਮਾਈਏ ਕੋਈ ਕਾਜਬ ਕਾਜ ਲਾਜ ਗਈ ਕਾਜ ਸਰਿਆ ਨਹੀਂ ਪ੍ਰੇਮ ਬਿਨਾ ਪ੍ਰਭ ਕੋ ਕੇ ਸੰਸਕੇ ਦੋਖੀ ਕੋ ਉਦਿਆਨ ਪਰਮਾਈ ਹੈ ਆਤਕਾ ਦੋਖੀ ਉਜੜ ਪਾਈ ਹੈ ਨਾ ਤਾਂ ਉਹ ਇੱਜ਼ਤ ਮਣੀ ਸੰਸਾਰ ਜਿਹੜੀ ਗੁਰੂਆਂ ਦੀ ਉਹ ਉਦਿਆਨ ਬਣੀ ਉਹਦੀ ਜਗ੍ਹਾ ਬਦਲੋ ਬਣੀ ਗਈ ਪਰ ਜਿੱਥੇ ਉਹ ਅਨਸ ਸੀ ਨਾ ਉਹ ਸ਼ਾਂਤੀਆਂ ਸੋ ਲੋਗ ਦੀ ਸ਼ਾਂਤੀ ਲੋਕ ਦੀ ਇੱਜ਼ਤ ਸੱਚੇ ਮਾਰਗ 'ਤੇ ਚੱਲਦੇ ਆਂ ਉਸਤਤ ਕਰੇ ਜਾਓ ਤੇ ਇਹ ਹੋਈ ਤੇ ਉਹ ਹੋਈ ਕਿਤੇ ਕਾਜ ਨਾ ਪਹੁੰਚਾ ਦੋਹਾਂ ਕੋਈ ਗੰਬਰੀ ਨਹੀਂ ਸੋ ਕੇ ਦੋਖੀ ਕੋ ਉਧਿਆਨ ਸੰਤ ਕੇ ਦੋਖੀ ਕੋ ਉਧਿਆਨ ਕਹਿੰਦੇ ਉਹਨੂੰ ਤਾਂ ਜੰਮ ਦੇ ਕਮਾਈ ਜਾਂਦਾ ਨੇ ਉਧਿਆਨ ਦੇ ਵਿੱਚ ਜਨਮ ਲਈ ਲੈ ਜਾ ਫਤੇ ਸੱਪ ਬਣ ਜਾ ਕਰੇ ਜਿੜੀ ਬਣ ਜਾ ਕਰੇ ਕੋਈ ਕੌਮ ਨਹੀਂ ਆਉਂਦੀ। ਉਹਦੇ ਨੇ ਝਾਨ ਪਰ ਜਨ ਮਿਲਦਾ। ਰੁਕਾ ਜਾਂਦਾ ਤਾਂ ਕਰਪਟ ਹੋਣਾ ਸ਼ਹਿਰ ਹੋਊਗਾ। ਸੋ ਸੰਤ ਕਾ ਦੋਖੀ ਉਚੜ ਪਾਈਏ। ਉਚੜ ਪਣ। ਪਿਆ ਰਹਿੰਦਾ ਹੈ। ਉਚੜ ਪਿਆ ਰਹਿੰਦਾ ਤੁਮ ਔਰ ਆਪ ਇਹ ਉਜੜ ਚ ਪਿਆ ਹੋਇਆ ਹੈ ਉਜੜ ਚ ਪਏ ਬਿਨਾ ਸੰਤ ਦੀ ਖਲਾਸਤ ਹੋਈ ਨਹੀਂ ਉਹ ਸੰਤ ਵੀ ਉਹ ਸਿੱਧਾ ਫਿਰ ਕਾਦੀ ਉਹਨਾਂ ਟਕਰਾਇਆ ਸੰਤ ਦਾ ਦੋਖੀ ਅੰਦਰ ਤੇ ਸੋਥਾ ਕਿਉਂ ਸਾਹਸ ਬਿਨਾ ਮਿਰਤਕੀ ਕੀ ਲੋਥਾ ਸਤ ਦਾ ਦੋਖੀ ਅੰਦਰ ਤੇ ਧੁੱਤਾ ਅੰਦਰ ਉਹਦੇ ਹਿਰਦੇ ਵਿੱਚ ਗਿਆਨ ਬਿਲਕੁਲ ਇਹ ਅਗਿਆਨਤਾ ਹੈ ਬਹੁਤ ਜਿਆਦਾ ਬਹੁਤ ਹਲਕਾ ਜਿਹਾ ਚੰਦ ਰੋਣਾ ਨਹੀਂ ਐਸਾ ਹੋ ਵੀ ਸਾਧਵੀਨ ਬਿਰਤਕੀ ਲੋਥਾ ਹੈ ਜਦ ਹੁੰਦੀ ਸਾ ਆਉਣਾ ਦੀ ਪਰ ਹਵਾਦਰ ਜ਼ਰੂਰ ਰਹਿਦੀ ਹੈ ਹਵਾ ਦਾ ਹੁੰਦੀ ਹੈ ਜੇ ਦਬੇ ਨਿਕਲਦੀ ਹੈ ਬਾਹਰ ਛਾਤੀ ਦਬੇ ਹਵਾ ਨਿਕਲਦੀ ਹੈ ਬਾਹਰ ਪਰ ਸਾਦੀ ਜਾਂਦਾ ਇਹ ਤੋਂ ਤਾਂ ਐਡੀ ਗਲੈਡ ਹੈ ਐਡੀ ਗਾ ਅੰਦਰ ਐਡੀ ਗਲੈਡ ਹੈ ਜਿਹੜੀ ਲੈ ਕੰਬੀ ਕਰਦੀ ਉਹ ਲੈਡ ਤਾਂ ਸੱਤ ਦਾ ਦੌਖੀ ਕੀ ਜੜ ਤੇ ਸਦਾ ਉਹਦੀ ਜੜ ਨਹੀਂ ਹੈ ਸੱਤ ਧਰਤੀ ਦੇ ਉੱਪਰ ਜਿਹੜਾ ਦਾਣਾ ਜੰਮ ਪਵੇ ਕੁਝ ਜੜਿਆ ਹੋਇਆ ਔਰ ਜਦੋਂ ਪੈਦਾ ਹੁੰਦਾ ਪਰ ਫੜਦਾ ਨਹੀਂ ਹੁੰਦਾ ਫੜ ਨਹੀਂ ਲੱਗਦਾ ਉਹ ਤੇ ਉੱਪਰ ਵੀ ਹੋ ਜਾਂਦਾ ਉਹ ਬੜਾ ਹੋ ਕੇ ਘਰ ਜਾਣੇ ਕੇ ਬਾਅਦ ਉਹ ਵੀ ਨਹੀਂ ਬਣਦਾ ਉਹਦੀ ਜੜ ਨਹੀਂ ਹੈ ਜੜ ਨਹੀਂ ਉੱਦਦੀ ਉਹ ਜੜ ਗਿਆ ਝੋੜਦੇ ਜੜੀ ਹੁੰਦੇ ਝੋੜੂ ਹੀ ਲੱਗਾ ਹੋ ਜਾਂਦਾ ਹਮ ਬਸ ਜਾਂਦਾ ਪਰ ਜੜੀ ਉੱਦਦੀ ਨਹੀਂ ਅਦੋਂ ਕਦੋਂ ਅਜੇ ਤੱਕ ਦੁਪਹਿਰਾ ਨਹੀਂ ਲੱਗਿਆ ਸਾਰੇ ਸੁੱਕ ਗਏ ਜੇ ਜੜੀ ਹੁੰਦੀ ਕਿਵੇਂ ਸੁੱਕ ਜਾਂਦੇ ਦੁਪਹਿਰਾ ਵੀ ਕੋਈ ਦੁਪਹਿਰਾ ਨਹੀਂ ਲੱਗਿਆ ਨਾ ਸਾਰੇ ਸੁੱਕ ਗਏ ਇਹ ਜੜੇ ਇਹ ਨਹੀਂ ਸੀ اے سنت کے دکھی دے اے سنتوں نے سکھا دندے جڑ سچ دی جڑ کون سکھا دوں سکھا دینا سچ دی جڑ چلدی اس کا وچ ذی ر ہوتا سچ دی جڑ نہیں سکھائی جا سکتی اے دے خلاف تاں بول دے نہیں ہوندا اس کون جیڑی جڑ کو سکھاਉਣ والے بھی نہیں نا کہ سکھے جی ਹੱਕ ਅਜ ਬੋਲ ਕੇ ਹੀ ਇਹਦੇ ਹੱਕ ਜੀ ਬੋਲਦੇ ਨੇ ਇਹਨੂੰ ਵੜਿਆ ਹੀ ਗੁਰਬਾਨੀ ਦੀ ਕਰਨ ਤੇ ਪੜਾਈ ਕੁਝ ਇਹਦੀ ਆੜ ਵਿੱਚ ਪੜਾਈ ਕੁਝ ਹੋਰ ਕਰਾਉਣ ਗੁਰਮਤ ਦੇ ਖਿਲਾਫ ਉਹ ਸੰਤ ਕੇ ਦੁਖੀ ਦੇ ਜਿਹੜੇ ਜਿਹੜੇ ਕੰਮ ਕਰਦੇ ਨੇ ਆ ਜੀ ਨਾ ਉਹ ਸੰਤ ਕੇ ਦੁਖੀ ਹੈ ਉਹ ਜਨ ਆਪਣੇ ਆਪ ਨੂੰ और दुनिया نے مان لینا ہے سنت کے دو کی دے فرض جرم قربانی کے فرض جرم ہے حکم ہے پرمیشر کا یہ سبحان ہے اے اے دے وچ دستا سنت کا دوخی کون ہوتا ہے سنت کے دوخی کی دستے نشانی جے نہ سنت کا دوخی ਤੋਗ ਵੱਲ ਜਾਂਦੇ ਸੱਚ ਦੇ ਵਿਰੋਧ ਦੇ ਵਿੱਚ ਖੜੇ ਹੋਣ ਦੇ ਲੋਕ ਬਚ ਜਣ ਤਾਂ ਦੱਸੋ ਇਹਨਾਂ ਲੋਕਾਂ ਦੇ ਨਾਲ ਖੜੇ ਦੇ ਵਿੱਚ ਤੁਹਾਨੂੰ ਕੀ ਬੜੂਗਾ ਕੁਝ ਕੀੜ ਗਿਆ ਅੱਜ ਉਹਨਾਂ ਦਾ ਨੋ ਹੈ ਨਹੀਂ ਸਾਰੀ ਹਿਸਟਰੀ ਉੱਥੇ ਖੜੀ ਹੈ ਸਾਰੀ ਹਿਸਟਰੀ ਇੱਥੇ ਖੜੀ ਹੈ ਅੱਜ ਸਾਡੇ ਕੋਲ ਹੈ ਸ੍ਰੀ ਚੱਦਨ ਕੀ ਲੈ ਲਿਆ ਕੀ ਬੜਿਆਈ ਹੈ ਉਹਦੇ ਖਿਲਾਫ ਅਸੀਂ ਬੋਲਦੇ ਆਂ ਖਲਾਫ ਵੀ ਬੋਲਦੇ ਉਹਦੇ ਬਾਰੇ ਸੱਚ ਦਾਦ ਦੇ ਖਲਾਫ ਲੱਗਦਾ ਉਹ ਸੱਚ ਦੇ ਖਲਾਫ ਸੀ ਜੇ ਸੱਚ ਬੋਲਾਂਗੇ ਤੇ ਉਹਦੇ ਖਲਾਫ ਬੋਲਿਆ ਜਾਣਾ ਆਪਣੇ ਆਪ ਇਹ ਕਹੇ ਸੱਚ ਦੇ ਖਲਾਫ ਜਿਹੜਾ ਸੱਚ ਦੇ ਖਲਾਫ ਹੈ ਜਾਂ ਸੱਚ ਆਊਗਾ ਉਹਦੇ ਖਲਾਫ ਲੱਗੂਗਾ ਇਹ ਬੋਲ ਇਹ ਤਾਂ ਸੱਚ ਦੀ ਗੱਲ ਕੀਤੀ ਹੈ ਹਾਂ ਸੱਚ ਕੇ ਖਲਾਫ ਨਹੀਂ ਸੱਚ ਦੀ ਕਿਸੇ ਦਾ ਖਲਾਫ ਹੁੰਦਾ ਸੱਚ ਦੀ ਖਲਾਫ ਕਰਦੇ ਨੇ ਲੋਕ ਸੱਚ ਦੀ ਖਲਾਫ ਕਰਦਾ ਝੂਠ ਝੂਠ ਹੈ ਸੱਚਾਰ ਸਭ ਸਾਰੇ ਆਦਮੀ ਸੱਚ ਦੀ ਖਲਾਫ ਕਰੂਗਾ ਜਿਹੜਾ ਇੱਥੇ ਭਗਤ ਹੈ ਉਹ ਸੱਚ ਦੀ ਖਲਾਫ ਨਹੀਂ ਕਰੂਗਾ ਭਗਤਾਂ ਦੇ ਸਰਕਾਰੀਆਂ ਜੋੜ ਦੇਣਗੇ ਜੋੜ ਦੇਣਗੇ ਜੋੜ ਤਾਂ ਹੀ ਹੋਗਾ ਉਹ ਭਗਤਾਂ ਦੇ ਸੰਤਾ ਦੇ ਨਾਲ ਖੜੇ ਨੇ ਜਿਹੜੇ ਲੋਕ ਉਹ ਸਾਰੇ ਹੀ ਭਗਤ ਨੇ ਉਹ ਸਾਰੇ ਹੀ ਸੰਤ ਨੇ ਕੋਈ ਸੰਦੋਚਾਲਾ ਵੀ ਨਹੀਂ ਹੁੰਦਾ ਇਹ ਆ ਭਗਤ ਜਿਹੜੇ ਉਹਨਾਂ ਦਾ ਸਿੱਪਤੀ ਉਹਨਾਂ ਦੀ ਗੱਲ ਨੂੰ ਬਣਦੇ ਨੇ ਉਹ ਸਾਰੇ ਹੀ ਸੰਤ ਨੇ ਅੱਜ ਨਹੀਂ ਬਣੇ ਕੱਲ ਨੂੰ ਬਣ ਜਾਣਗੇ ਹਾਲੇ ਛੋਟੇ ਨੇ ਕੋਈ ਕੋਈ ਜੰਮਦਾ ਕੋਈ ਬੀਜ ਹੈ ਅੰਦਰ ਇੱਛਾ ਹੋਈ ਆਪਣ ਦੇ ਵੀ ਅਗਲੇ ਜਨਮ ਸਹੀ ਹੋਣਗੇ ਇਦਰੇ ਜਾਦੀ ਨਗਰ ਦੇ। ਤੇ ਉਹਨਾਂ ਨੇ ਵਰਜੀ ਐਤ ਕੀ ਆਜਾ ਐਸ ਕੀ ਵੀ ਆਜਾ ਤੇ ਅਗਲੀ ਵਾਰ ਆਜਾਂਗੇ ਪਰ ਬਰੋਦ ਵਿੱਚ ਨਹੀਂ ਜਾਣਗੇ ਵਰੋਡੇ। ਤੇ ਅੰਦਰ ਲਿਖਿਆ ਹੋਇਆ ਢੁਗੋ। ਤੇ ਅੰਦਰ ਖੋਦਿਆ ਹੋਇਆ ਅੰਦਰ। ਬਸ ਮਾਂ ਪੱਥਰ ਤੇ ਲਿਖਿਆ ਹੋਇਆ। ਕੋਈ ਪੜ ਸਕਦਾ ਨਹੀਂ। ਲੇਖਤੋ ਬੇਟੀ ਇਹ ਸਗੀ। ਜੋ ਲਿਖਿਆ ਕਰਤਾ। ਨੇ ਲਿਖਿਆ ਹੋਇਆ ਸਰੋ। ਆਹ ਵਰਕਰਤਾਵ ਦਾ ਲਿਖਿਆ ਹੋਇਆ ਵੀ ਡਿਆ ਗਿਆ ਸੋ। ਹੋਜੀ ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ। ਸੰਤ ਨਾਨਕ ਸੰਤ ਭਰਵੇ। ਵਰਕਰਤਾਵ ਦਾ ਇਹ ਲਿਖਿਆ ਹੋਇਆ ਆਹੀ ਲਿਖਿਆ ਉਹਦਾ ਮੈਂ ਸਾਡਾ ਵਿਰੋਧ ਕਰਨਾ ਹੈ ਸਾਡਾ। ਕੀ ਸਾਜੇ ਨੌਰਮੇ ਰਹਿਣਾ ਹੈ ਸਾਡੇ ਵਿਰੋਧ ਕਰਦੇ। ਇਹ ਕਰਤਾਰ ਦਾ ਲਿਖਿਆ ਹੋਇਆ ਕਿਹੜਾ ਵਿਰੋਧ ਚ ਲੈ ਕੇ ਆਇਆ ਖੜੇ ਨੇ ਖੜੇ ਰਹਿਣਗੇ ਖੜੇ ਰਹਿੰਦੇ ਹੁੰਦੇ ਨੇ ਥਕਾਲੇ ਉਹ ਵੀ ਡਰ ਜਾਂਦੇ ਉਹਨਾਂ ਇੱਥੇ ਵੀ ਜਿਨ ਰਾਖਤੇ ਦੇਵਤੇ ਕੀਏ ਬੋਲੇ ਹਰੀ ਕੋ ਰ ਆਪਣੈ ਸਦਵਾਰ ਜਿਨ ਮਾਨਸ ਦੇਵਤੇ ਕੀ ਇਹ ਆ ਤਾਂ ਮਾਨਸ ਤੇ ਦੇਵਤੇ ਬਣ ਜਾਣਗੇ ਜਿਹੜੇ ਮਾਨਸ ਰਹਿ ਗਏ ਨਾ ਦੇਵਤੇ ਨਾ ਬਣੇ ਉਹ ਫੇਰ ਵਿਰੋਧ ਚਲੇ ਜਾਣਗੇ ਦਾਦਾ ਮਾਨਸ ਤੇ ਦੇਵਤੇ ਬਣ ਜੂਗੇ ਜਿਹੜੇ ਨਾ ਬਣੇ ਉਹ ਵਿਰੋਧ ਖੜੇ ਹੋ ਜਾਣਗੇ ਇੱਕ ਚੁੱਪ ਵਿਰੋਧ ਚ ਉਹਨਾਂ ਦੇ ਕੁਝ ਬੁਖਰ ਵਿਰੋਧ ਹੋ ਜਾਣਗੇ ਬੋਲ ਕੇ ਵਿਰੋਧ ਵੀ ਕਰਨਗੇ ਝਟ ਕੇ ਵਿਰੋਧ ਵੀ ਕਰ ਦੂਗੇ ਉਹ ਦੇ ਨਾਲ ਸਭ ਧੋਣਦੇ ਪਰ ਬੋਲਣਗੇ ਤਲਾਉ ਨੱਕ ਵੀ ਹੋਗਾ ਪਹਿਲਾਂ ਹੁੰਦਾ ਰਿਹਾ ਹੁਣ ਹੋਊਗਾ ਹਾਂ ਤੜਾ ਹੁਣ ਬਹੁਤ ਕਮਜ਼ੋਰ ਹੋਊਗਾ ਕਮਜ਼ੋਰ ਹੋਊਗਾ ਹਾਲਾਤ ਐਸੇ ਹੋ ਗਏ ਜਦੋਂ ਦੁਨੀਆਂ ਦੇ ਗਿਆਨ ਵੱਜ ਗਏ ਉਹ ਜੋ ਸੱਚ ਮਜ਼ਬੂਤ ਹੁੰਦਾ ਸੱਚ ਦਾ ਮਰੋੜ ਜਿਹੜਾ ਕਰਨ ਵਾਲਾ ਤਲਾਉ ਬੀਜੋ ਹੁਣ ਗਿਆਨ ਟੌਪ ਤੇ ਗਿਆ ਹੋਇਆ ਉਹਦਾ ਹੁਣ ਪੂਰੇ ਸਪੈਕਟਰੇ ਖੋਜ ਕਰੂ ਜਿਹੜਾ ਕਾਲ ਦੀ ਖੋਜ ਕਰੂ ਮੈਂ ਚਾਹੁੰਦਾ ਹਾਂ ਮਤਲਬ ਹੈ ਜਿਹੜਾ ਘਾਰ ਹੈ ਜੋਤ ਹੈ ਉਹਦੀਓ ਚਾਹੁੰਦੇ ਨੇ ਵੀ ਉਹ ਹੀ ਸਾਡੂੰ ਖੋਜ ਆ ਜਾ ਸਾਡੇ ਪਕੜ ਚ ਆ ਜਾ ਸਾਇੰਸ ਵੀ ਤੇ ਚੌਂਦੀ ਹੈ ਉਹ ਕਿਉਂ ਨਹੀਂ ਜੇ ਲੋਕ ਚਾਹੁੰਦੇ ਹੁਣ ਖੋਜੀ ਜਲਦੀ ਹੋਵੇ ਉਹ ਸਮੇਂ ਹੋਵੇ ਉਹ ਸਾਰੇ ਇਕੱਠੇ ਹੋ ਜਾਣਗੇ ਉਹ ਆਪਣੇ ਤਰੀਕੇ ਨਾਲ ਹੋਈ ਦੇ ਆ ਰਹੇ ਇਹ ਹੋਰ ਤਰੀਕਾ ਉਹਨਾਂ ਨੇ ਸਮਝ ਲੈਣਾ ਹੈ ਛੇਤੀ ਜੋ ਸਮਝਣ ਜੀ ਕੋ ਬਹੁਤੀ ਗੱਲ ਦੀ ਹੈ ਹਾਂ ਜੀ ਸੰਤ ਕੇ ਦੋਖੀ ਝੂਠ ਬਣਾ ਲਈ ਉਹਨਾਂ ਨੇ ਤੁਸੀਂ ਕੀ ਸਭ ਤੇ ਨਾਲ ਲੱਡੜ ਨਹੀਂ ਹਲ ਝੂਠ ਫੜਦੇ ਨੇ ਬਹੁਤ ਨੇੜੇ ਪਹੁੰਚੇ ਹਨ ਨਾ ਕੋੜਾ ਥੋੜਾ ਹੀ ਹੈ ਬਹੁਤਾ ਫਰਕ ਨਹੀਂ ਹੈ ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਦਾ ਲੈ ਉਵਾਸ ਸੰਤ ਕੇ ਦੋਖੀ ਕੋ ਅਵਰ ਕੋਈ ਨਹੀਂ ਬਚਾ ਸਕਦਾ ਕੋਈ ਨਹੀਂ ਕਹਦਾ ਜਾ ਮੇਰੇ ਕੋ ਫੜ ਜਾ ਮੈਂ ਤੇਰੀ ਤੇਰਾ ਕੇਸ ਲੜ ਲੂਗਾ ਕਾ ਤੇਰੀ ਜਵਾਨ ਦੇ ਦੂਗਾ ਨਾਨਕ ਸੰਤ ਨੂੰ ਆਵਾਜ਼ ਲੈ ਉਹ ਸੰਤ ਸਾਵੇ ਦਾ ਲੈ ਵਾ ਜੇ ਕਿਤੇ ਸੰਤ ਦੀ ਛੱਡ ਚਲਾ ਗਿਆ ਨਾ ਉਹ ਸੰਤ ਸਾਹਮਣੇ ਜੇ ਜੰਗ ਪੜੇ ਸੋਹਣੇ ਲੋਕ ਹਰ ਕੇ ਕੋਈ ਟਿਕਾਨ ਨਹੀਂ ਕਿਤੇ ਜਾ ਕੇ ਛੱਡ ਪੈ ਜਵੇ ਕਿਸੇ ਨੇ ਪੁੱਛਣਾ ਦੀ ਪਰ ਜੇ ਸੰਤ ਚਾਹੇ ਛੱਡ ਪੈ ਜਵੇ ਸਰਡ ਪੈ ਜਵੇ ਤਾਂ ਸੰਤ ਨੂੰ ਚਾਹਣਾ ਪੈਣਾ ਹੈ। ਸਨ ਆਏ ਤੇ ਸੰਢ ਲਾਏ ਉਹਦੇ ਦੇ ਵੀ ਪਵੰਦੀ ਹੈ। ਬੜੀ ਸੰਤ ਨਹੀਂ ਹੋ ਸਕਦਾ ਜੇ ਘੰਟ ਨਹੀਂ ਲਾਊਗਾ। ਮਨੇ ਉਹ ਵੀ ਉਪਮਤ ਤੋਈ ਹੈ। ਉਹ ਵੀ ਉਪਮਰੇ ਹੈ। ਨਾਨਕ ਸੰਤ ਭਾਵੇਂ ਤਾਂ ਲੈ। ਪਰ ਸੰਤ ਜੇ ਚਾਹੁੰਦਾ ਹੋਵੇ, ਹੁਣ ਸੰਤ ਕਦੋਂ ਚਾਹੂਗਾ ਸਵਾਲ ਹੈ। ਇਹਨਾਂ ਛੋਟਣਾ ਹੁਣ ਸੰਤ ਕੇ ਦੁਖੀ ਨੇ ਉਹਨੂੰ ਕਹ ਸੰਤ ਪਾਵੇ ਤਾਂ ਲੈ ਵਾਰ ਤੇਰੇ ਉੱਥੇ ਆ ਉਹਨਾਂ ਰੱਖਣਾਰ ਉਹਦੇ ਵਾਸਤੇ ਕੋਈ ਨਹੀਂ ਦੇ ਦੇ ਕੋਈ ਇਹਨਾਂ ਬਰੀਜ਼ ਹੋਵੇ ਸੰਤ ਕਾ ਦੁਖੀ ਜੇ ਕੋਈ ਬਰੀਜ਼ ਹੋਵੇ ਸੰਤ ਨੂੰ ਦੁੱਖ ਦੇਣ ਦੀ ਅਵਗਿਆ ਜੇ ਕਿਸੇ ਨੇ ਕੀਤੀ ਹੋਵੇ ਤਾਂ ਸੰਤ ਕੋਈ ਹੋਰ ਹੋਵੇ ਜਾਂ ਉਹ ਹੋਵੇ ਸੰਤ ਕੋਈ ਗੱਲ ਪਰ ਸੰਤ ਹੋਵੇ वो जो चाहे तो वो कर सकता कह सकता चलते होगी जे जेदा गजर किताब कहता जे तू संग चाके माफी मांगे मुंह झुका फड़ के कलत पार खड़ के तेनु माफ कर सकदी है सब प्राय चित्तों करे लिया ताही कह रहा ਤਾਂ ਹੀ ਤਾਂ ਹੋਇਆ ਕਿ ਇਹ ਪੇਸ਼tau ਹੋਇਆ ਕਹਿਦਾ ਕਹਿੰਦਾ ਜੋ ਪ੍ਰਾਇਕ ਕਲੂਗਾ ਜੋ ਬਦਲੂਗਾ ਤੇ ਤੇ ਵਗਿਆ ਹੋਈ ਹੈ ਜੋ ਮਨ ਨੂੰ ਵੀ ਕੋਈ ਗੱਲ ਹੈ ਜੇ ਉਹਦੀ ਬੁੱਧੀ ਹੋ ਜਵੇ ਉਹ ਪਤਾ ਹੈ ਬੁਰਹਨ ਬੁੱਧੀ ਹੁੰਦੀ ਹੋਦੀ ਹੈ ਕੋਈ ਸੰਤ ਕਾ ਧੋਖੀ ਤੇ ਇਹਨੂੰ ਬੁੱਧੀ ਹੋਈ ਉਹ ਗੁਰੂ ਸੀ ਜਾਂਦੀ ਹੋਈ ਜਿਹੜੇ ਤਾਂ ਹੋਏ ਜੇ ਬੁਰਾ ਨਹੀਂ ਕੋਈ ਬਤਨ ਨਹੀਂ ਤਾਂ ਜਦਾ ਵਿਰੋਧ ਕਰਦੇ ਹੀ ਕਿਉਂ ਕਰਦੇ ਹੀ ਕਿਉਂ ਇਹ ਜੇ ਤਾਂ ਪਿੱਛੇ ਹੀ ਹੈਗੇ ਕੀ ਬਣਾ ਸਾਹਮਣੇ ਆਉਂਦੇ ਰਹੇ ਨੇ ਵਾਰ ਦਸ ਹੁਣ ਕੇ ਆਪੇ ਦੇਣਾ ਤੁਰੇ ਵੀ ਨਹੀਂ ਆਪਾਂ ਰਾਹ ਵੀ ਪਤਾ ਲੱਗੇ ਦਾ ਅਸਰ ਅਸਰਾ ਇਹ ਤਾਂ ਆਹੀ ਦੀ ਜ਼ਰੂਰਤ ਆ ਫਿਰ ਲੱਗਦਾ ਹੋ ਰਹੀ ਐਡਾ ਵਿਚੇ ਹੀ ਫਸੇ ਪਏ ਨੇ